ਰਾਣਾ ਰਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਰਾਣਾ ਰਉ ਨਾ ਕੋ ਰਹਿ ਕੋਈ ਛੋਡਾ ਰਾਣ ਕੋਈ ਵੱਡਾ ਰਉ ਠੀਕ ਹੈ RAMDANA ਤੁੰਗ ਨਾ ਬਾਰੀ ਆਪੋ ਆਪਣੀ ਕੋਈ ਨਮੰਦ ਧੀਰ ਆਪੋ ਆਪਣੀ ਬਾਰੀ ਸਭ ਨਹੀਂ ਚਲੇ ਜਾਣਾ ਧੀਰ ਜਿਕੇ ਕਹਿੰਦੇ ਧੀਰ ਤੇ ਗਰੰਟੀ ਕਿਸੇ ਦੀ ਨਹੀਂ ਹੈ ਤੇ ਵੀ ਰਹੂਗਾ ਹੋ ਕਾਬੇ ਨੂੰ ਕੋਈ ਨਹੀਂ ਕਹਿੰਦਾ ਮੈਂ ਬੰਦਾ ਦੀ ਐਸਾ ਕੋਈ ਜਵਾਨ ਕੋਈ ਨਹੀਂ ਹੈ ਜਿਹੜਾ ਕਹੇ ਮੈਂ ਨਹੀਂ ਮਰਦਾ कोई न तीर हां जी राह बरा तिहावला सर डूंगर असगा मैं तन अफगन चूर बिन गुण चूं कर जा राह बरा पी हावला सर डूंगर असगा का बरा के हावला पे हमर रास्ता सर डूंगर ऊपर डूंगर कोई पता ਆਇਆ ਕਿਸੇ ਨੇ ਦੱਸਿਆ ਨਹੀਂ ਇੱਥੇ ਇੰਨਾ ਡੁੱਗਾ ਇੱਧਰ ਕਹਿੰਦਾ ਥੋਪਤ ਆਵਦੀ ਦੱਸਿਆ ਕਿਸੇ ਨੇ ਦੱਸਿਆ ਅਸਗਾ ਮੈਂ ਤਨ ਅਵਗਣ ਝੂਰ ਮੋਈ ਵਿਣਗੁਣ ਕਿਉਂ ਕਰਦਾ ਮਹਾਂ ਤਾਂ ਬੇਰੇ ਦਲ ਦੇ ਵਿੱਚ ਆਉਂ ਗੜੇ ਉਗੜਨੇ ਪਾਏ ਤੇ ਮੈਂ ਤਾਂ ਬੇੜੀਆਂ ਚ ਇਸ ਤਰੀਕੇ ਨਾਲ ਮੈਂ ਆਪਣੇ ਘਰ ਜਾਵਾਂ ਕੋਣ ਕੋਈ ਨਹੀਂ ਹੈ ਰਾਬੁਰਾ ਤੇ ਹਾਵਲਾ ਸਾਡ ਡੁੱਗ ਰਸ ਘਾਏ ਚੱਲਣਾ ਹੁੰਦਾ ਦੀ ਕਿ ਟੋਲੀ ਹੁੰਦੀ ਦੀ ਕਿਤੇ ਪੱਥਰ ਲੱਦੇ ਹੋਏ ਦੇ ਤਰੀਕੇ ਨਾਲ ਧਰ ਜਾ ਸਕਦੀ ਕੋਈ ਤਰੀਕਾ ਨਹੀਂ ਜਾਂ ਦਾ ਪਾ ਦਦੂਪੂ ਜੀ ਕਿਸਤੀ ਜਾਂਦੀ ਸਾਰੇ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉ ਤਨ ਮਿਲੋ ਪਿਆਰ ਤਿਨਹੀ ਜੈਸੀ ਠੀ ਰਹਾ ਜਪ ਜਪ ਰਿਦੈ ਮੁਰਾਰ ਗੁਣੀਓ ਜਿਵੇਂ ਗੁਣੀ ਲੋਕ ਲੈ ਹੋਰ ਪ੍ਰਭ ਨੂੰ ਬੁਲਦੇ ਨੇ ਹੂੰ ਲੋਕਾਂ ਕੋ ਪਹਿਲੇ ਨੇ ਹੋਰ ਗੋੜੇ ਨੇ ਨੇ ਪ੍ਰਭ ਮਿਲੇ ਪ੍ਰਭ ਨੂੰ ਮਿਲ ਜਾਂਦੇ ਨੇ ਇੱਤੋਂ ਗੁਰੂ ਮਿਲਤਾ ਇਹ ਉਸ ਤਾਈ ਬੋਲ ਜਾਂਦੇ ਗੁਰਦੀ ਤੱਕ ਤੇ ਥੋਗ ਤੱਕ ਪਹੁੰਚ ਜਾਂਦੇ ਹੂੰ ਹੂੰ ਰੱਬ ਕੋਲ ਰੱਬ ਕੋਲ ਚਲੇ ਜਾਂਦੇ ਜਿੱਦੀ ਗੁਰਾਂ ਦੀ ਕਮੀਆਂ ਸੂਰੀ ਗੱਲਾਂ ਤੇ ਹੂੰ ਨਾਲ ਪਿਆਰ ਹੁੰਦਾ ਗੁਣੀਆਂ ਗੁਰ ਰੱਬ ਲੈ ਤਿੰਨ ਮਿਲੋ ਪਿਆਰ ਤਿੰਨ ਹੀ ਜੈਸੀ ਥੀ ਰਹਾਂ ਜਪ ਜਪ ਰਿਦਾ ਮੁਰਾਰ ਵਸੇ ਜਾ ਪ੍ਰਭ ਮਿਲ ਕੇ ਪ੍ਰਭ ਜੈਸੀ ਥੀ ਰਹੋ ਪ੍ਰਭ ਵਰਗੇ ਹੋਗੀ ਫਿਰ ਜਪ ਜਪ ਰਿਦੇ ਮੁਰਾਰ ਰਿਦਾ ਦੀ ਮੁਰਾਦੀ ਨੂੰ ਜਾਣਦੀ ਹੋਗੀ ਉਦੋਂ ਕੋਲ ਫਾਇਦਾ ਕੰਮ ਨੇ ਠੀਕ ਹੈ ਜੀ ਫਿਰ ਤੇ ਦੇ ਹਰੂ ਜਪਿਆ ਮੂੰਹ ਦੇ ਵਿੱਚ ਨਹੀਂ ਜਪਿਆ ਹੰਮ ਜਪਣਾ ਜਪਣਾ ਦੋ ਚੀਜ਼ਾਂ ਨਾਲ ਫਰਕ ਆ ਹਾਂਜੀ ਬੋਲ ਕੇ ਨਹੀਂ ਜਪਿਆ ਜਾਂਦਾ ਹੰਦੇ 'ਚ ਗੁਪਤੇ 'ਚ ਜਪਿਆ ਜਾਂਦਾ ਵਿਚਾਰਿਆ ਜਾਂਦਾ ਵਿਚਾਰ ਨੂੰ ਜਪਣਾ हां जी अवगुण भरपूर हैं गुण भी वसे नाल बिन सतगुरु गुण ना japनी जिचर शब्द ना करे विचार अवगुणी भरपूर हैं अवगुण और भरपूर हैं मेरे गुणी अवगुणी भरपूर हैं गुण भी वसे नाल और सारा और गुण भी है के ਉਹਦੇ ਔਗਣੇ ਸੁੱਟੋੜੇ ਨੇ ਬੋੜ ਚਾਰ ਤਾਂ ਹੋ ਰਹੀ ਦੇ ਤੇ ਟਲੇ ਔਗਣ ਤਾਂ ਵਸਣ ਤੁਸੰਗੀ ਬਾਕੀ ਔਗਣ ਹੂੰ ਹੂੰ ਜਿਹੜੇ ਨੇ ਉਹੀ ਬਚਾਈ ਜਾਂਦੇ ਨੇ ਹੂੰ ਵੀ ਨਾਲ ਵਿਨ ਸਤਗੁਰ ਗੁਣ ਨਾ Japni ਜਿੱਤੇ ਕਰੇ ਵਿਚਾਰ ਸਾਤਬੋਲਦੇ ਮਨ ਨੂੰ ਗੁਣਾ ਰੋਪਣਾ ਦੀ ਪਛਾਣ ਲਈ ਹੋਣੀ ਹੂੰ ਹੂੰ ਉਹ ਤਾਂ ਰਜੋ ਤਮਸ ਤੋਂ ਉੱਤਰ ਨੂੰ ਗੁਰਦੇ ਕਹੀ ਜਾਂਦੇ ਨੇ ਹੂੰ ਹੂੰ ਉਹ ਰਜੋ ਤਮਸ ਨੂੰ ਵੀ ਗੁਰਦੇ ਕਹੀ ਜਾਂਦੇ ਅਜਿਹੇ ਗਿਆਨ ਵਨਾ ਉਹਨਾਂ ਦੀ ਰੋਕਣਾ ਦੀ ਸਮਝ ਨਹੀਂ ਹੋਣੀ। ਜਿਵੇਂ ਜਬਰ ਦੇ ਬੁਰਾ ਹਰਦੇ ਤੇ ਬਾਅਦੇ ਪਤਾ ਲੱਗਿਆ। ਵਾਰ ਗੁਣ ਬੰਤ ਜਿਹੜੇ ਗੁਣ ਉਹ ਜਿਹੜੇ ਉਹੀ ਗੁਣ ਨੇ ਜਿਹੜੇ ਉਹ ਚ ਗੁਲਦੇ ਆ ਗੁਣ ਠੀਕ ਹੈ ਜੀ। ਮ੍ਰਿਣ ਸਤਗੁਰ ਗੁਣ ਨਾ Japni। ਆਹ ਸ਼ਬਦ ਨਾ ਕਰੇ ਵਿਚਾਰ।